शलोक मोहल्ला तीजा इस जग में संती तन खट्या जिना सतगुरु मिलया प्रभु आए सतगुरु सत्त इस तन की कीमत कही ना जाए हम जणावे ए जग दे विचार ते देह तन खट्या है के नामदार भक्त आगे संसार ਜਿਨ੍ਹਾਂ ਸਤਗੁਰੂ ਮਿਲਿਆ ਪ੍ਰਭਾਏ ਜਿਨ੍ਹਾਂ ਨੂੰ ਸਤਗੁਰ ਪ੍ਰਭ ਮਿਲ ਗਿਆ ਜਿਹੜੇ ਇੱਕ ਹੋ ਗਏ ਜਿਨ੍ਹਾਂ ਨੂ ਜਿਨ੍ਹਾਂ ਨੇ ਆਪਣੇ ਆਪਣੇ ਅੰਤਰਾਸਮਾਂ ਨੂੰ ਖੋਜ ਲਿਆ ਜਿਨ੍ਹਾਂ ਨੇ ਆਤਮ ਜੀਲ ਲਿਆ ਉਹਨਾਂ ਦੇ ਘਟਿਆ ਠੀਕ ਹੈ ਜੀ ਪਰ ਚਿੱਟੇ ਕੱਪੜੇ ਪਾ ਕੇ ਬਹੁਤ ਲੋਕਾਂ ਨੇ ਦੁਆ ਕਚਤਨ ਵੀ ਬਠੇਰਾ ਖਟਿਆ ਜੀ ਉਹ ਦੁਆ ਤਾਂ ਹੋ ਜਾ ਕੱਚੇ ਸੰਸਰ ਖਟਿਆ ਤਾਂ ਗੁਰ ਗਵਰਾਹ ਦਾ ਧੰਨ ਠੀਕ ਹੈ ਜੀ ਸਤ ਗੁਰੂ ਸੱਚ ਦਰੜਾਇਆ ਇਸ ਧੰਨ ਕੀ ਕੀਮਤ ਕਹੀ ਨਾ ਜਾਏ ਫਤਗੁਰ ਸਾਚੇ ਦਰੜਾਇਆ ਸਤ ਗੁਰੂ ਨੇ ਸੱਚ ਦਰੜ ਕਰਵਾਇਆ ਕੀ ਸੱਚ ਦਰੜ ਕਰਵਾਇਆ ਕਹਿੰਦੇ ਇਸ ਧੰਨ ਕੀ ਕੀਮਤ ਕਹੀ ਨਾ ਜਾਏ ਇਹ ਦੱਸਿਆ ਇਹ ਧੰਨ ਦੀ ਕੀਮਤ ਕੋਈ ਦੱਸੇ ਨਹੀਂ ਸਕਦਾ ਕਿੰਦੀ ਨਾਮ ਕੱਲ ਦੀ ਕੀਮਤ ਨਹੀਂ ਕਿਸੇ ਨੇ ਅਜ ਤਾਈ ਪਾਈ ਜਿੰਨਾ ਖਰਚੋ ਉਨਨੀ ਵੱਧਾ ਕਦੇ ਗੁੰਗ ਬਹੁਦੀ ਠੀਕ ਹੈ ਲੱਥੀ ਸੁਖ ਵਸਿਆ ਮਨਾਈ। ਧੰਨ ਦੀ ਪ੍ਰਾਪਤੀ ਨਾਲੇ ਭੁਖ ਲੱਗ ਗਈ। ਪ੍ਰਾਪਤੀ ਨਾਲ ਭੁਖ ਲੱਤੀ ਐ ਜੋ ਖਾਦਾ ਨਹੀਂ ਐ। ਪ੍ਰਾਪਤੀ ਨਾਲੇ ਭੁਖ ਲੱਗ ਗਈ। ਸੁਖ ਵਸਿਆ ਹੁਣ ਸੁਖ ਵਸ ਕੇ ਬਾਹਿਆ ਦੇ ਧੰਨ ਦੀ ਰਹੀ ਹੋਈ ਦੀਓ। ਰਾਤੂਰ ਸਾਚਿਦਰ ਆਇ ਇਸ ਦਸ ਕੀ ਕੀਮਤ ਨਹੀਂ ਕਹੀਂ ਨਾ ਜਾਏ ਇੱਕ ਤਨ ਪਾਈਆ ਭੁੱਖ ਲੱਤੀ ਖਾਦੀ ਭੁੱਖ ਮਾਇਆ ਦੀ ਭੁੱਖ ਲੱਤੀ ਸੁਖ ਵਸਿਆ ਮੁਰ ਨਾਏ ਮਾਇਆ ਦੀ ਭੁੱਖ ਗਈ ਮਨ ਸੁਖ ਬਸ ਗਿਆ ਹਾਂਜੀ ਜਿੰਨਾ ਕੋ ਧੁਰ ਲਿਖਿਆ ਇੰਨੀ ਪਾਇਆ ਆਏ ਅੱਜ ਇਹ ਘਰ ਧੁਰ ਲਿਖਿਆ ਵੀ ਫਾਇਲਾਂ ਲੈ ਕੇ ਲੈ ਗਿਆ ਨੰਦਰ ਦੂਕੇ ਤੋਂ ਆ ਕੇ ਦੇ ਤੇ ਡੋਲ ਛੇ ਹਾਂਜੀ ਮਨਮੁਖ ਜਗਤ ਨਿਰਧਨ ਹੈ ਮਾਇਆ ਨੂੰ ਬਿਲ ਲਾਏ ਅੰਦੇ ਨੇ ਫਿਰਦਾ ਪਦਾ ਰਹੇ ਭੁੱਖ ਨਾ ਕਦੇ ਜਾਏ ਦੂਜੇ ਭਾਗ ਇਹ ਮਨਮੁਖ ਨੇ ਸਾਰਾ ਜਗਤ ਮਨਮੁਖਾਂ ਨਾਲ ਭਰਿਆ ਹੈ ਮਨ ਮੁਖ ਜਾਗਤ ਨੇਰਤਾਨ ਹੈ ਤਾਂ ਤੋਂ 48 ਤੰ ਤੋਂ ਸਕਣਾ ਅਲਤੰਤਾਨ ਤਾਨ ਸੱਚੇ ਤੰ ਤੋਂ ਸਕਣਾ ਮਾਇਆ ਨੂੰ ਲਾਇ ਤਾਂ ਮਾਇਆ ਮਗਰ ਭੱਜੇ ਫਿਰਦਾ ਉਹ ਮਾਇਆ ਉਹ ਤਾਨ ਮਾਇਆ ਨੂੰ ਤਾਂ ਵੀ ਗਿਆ ਉਹ ਮਾਇਆ ਉਹ ਤਾਨ ਮਾਇਆ ਦਾ ਛੜ ਹੈ ਭਾਈ ਮਾਇਆ ਛੜ ਤੇ ਹੈ ਮਗਰ ਲੌਂਦੀ ਹੈ ਇਹ ਨਾਮ ਧਨ ਤੋਂ ਬਾਂਝਾ ਕਰਵਾ ਤੇ ਛਲ ਪਾ ਕੇ ਰੱਖਦੀ ਛਲ ਅੜਚ ਫਸਾ ਕੇ ਰੱਖਦੀ ਸਦਾ ਰਹੇ ਭੁੱਖ ਨਾ ਕਦੇ ਜਾਏ ਸਦਾ ਰਹੇ ਸਦਾ ਦਨੇ ਫਿਰਦੇ ਬੰਗ ਤੇ ਭੁੱਖ ਨਾ ਕਦੇ ਜਾਏ ਨਾ ਕਦੇ ਆਵੇ ਨਹਿ ਸੁਖ ਵਸੈ ਮਨ ਆਏ ਕਦਾ ਚਿੰਤ ਚਿਤਵਦਾ ਰਹੇ ਫੈਸਾ ਕਦੇ ਨਾ ਜਾਏ। ਮਨ ਦਾ ਕਦੇ ਸ਼ਾਂਤੀ ਆਉਂਦੀ ਹੈ ਜੇ ਨਾ ਮਨ ਦੇ ਵਿੱਚ ਕਦੇ ਸੁਖ ਪੈਦਾ ਬਣੇ ਨਹੀਂ ਸਕਦੀ। ਸ਼ਾਂਤੀ ਕਦੇ ਨਾ ਆਵੇ। ਨਾ ਸੁਖ ਵਸੇ ਮਨ ਆਏ। ਸਦਾ ਚਿੰਤ ਜਿਤਵਦਾ ਕਦੇ ਨਾ ਜਾਏ। ਸਦਾ ਚੇਤਵਦਾ ਰਹਿੰਦਾ ਚਿੰਤਾਈ ਦੇ ਚੇਤਵਦਾ ਰਹਿੰਦਾ ਆ ਨੀ ਉਹ ਕੱਲਣਾ ਕਿਉਂ ਹੋ ਗਿਆ ਕਿਉਂ ਨਹੀਂ ਹੋਇਆ ਜਿਲ ਵਿੱਚ ਚਿੰਤਾ ਜਾਂਦੀ ਹੈ ਕਿਸੇ ਘੜੀ ਹਾਂਜੀ ਨਾਨਕ ਵਿਣ ਸਤਗੁਰ ਮਤ ਭਵੀ ਸਤਗੁਰ ਨੂੰ ਮਿਲੇ ਤਾਂ ਸ਼ਬਦ ਕਮਾਏ ਨਾਨਕ ਬਿਨ ਸਤਗੁਰ ਤੇ ਬਿਨਾ ਇਹਦੀ ਮਤ ਪੁੱਠੀ ਹੋਗੀ ਸਤਗੁਰੂ ਨਹੀਂ ਮਿਲਿਆ ਸੱਚਦਾ ਗਿਆਨ ਨਹੀਂ ਮਿਲਿਆ ਕੋਈ ਸਮਝਾਉਣ ਵਾਲਾ ਨਹੀਂ ਮਿਲਿਆ ਇਹਦੀ ਭੁਖੀ ਮਤ ਭੁਖੀ ਵਾਇਆ ਬਾਲੂ ਭੁਖੀ ਮਾਤੇ ਦੀ ਭਵੀ ਸਤਗੁਰੂ ਫੇਰ ਮਿਲ ਜਵੇ ਉਹ ਉਪਦੇਸ਼ ਦੇਵੇ ਕਮਾ ਤੰਗ ਤੇ ਗੱਲ ਫੇ ਬਣੇ ਦੀ ਫਿਰ ਸਦਾ ਭੁਖੇਲੀ ਤੇ ਭੁਖੀ ਕਿ ਤੁਰਿਆ ਜਾਂਦਾ ਹਾਂਜੀ ਸਦਾ ਸਦਾ ਸੁਖ ਮੈਂ ਰਹੇ सच्चे माहे समाए और जब समा तीजा जिनी उपाय मेदनी सोई सार करे एको एक सिमरूप पाई रहो किस बिन अवर ना कोई जिन्न उपाई मेदनी ਉਹ ਜਿਹੜਾ ਕਰੇ ਜਿਹਨੇ ਕਹੇ ਭਰਤੀ ਫਾਇਦਾ ਕੀਤੀ ਹੈ ਉਸਨੇ ਇਹਦੀ ਇਸ਼ਾਰ ਕਰ ਲਈਏ ਉਸਨੇ ਇਹਦਾ ਚਿੰਤਾ ਕਰ ਲਈਏ ਇੱਕੋ ਸਿਮਰੋ ਭਾਈ ਰੋ ਇਸ ਬਿਨ ਅਵਰਨਾ ਕੋਈ ਇਸ ਕਰਕੇ ਇੱਕੋ ਸਿਮਰੋ ਭਾਈਓ ਇਸ ਬਿਨ ਕੋਈ ਉਹ ਹੁਕਮ ਹੈ ਉਸੇ ਨੂੰ ਸਬਰ ਕਰ ਲਓ ਦੂਜਾ ਨਹੀਂ ਕੋਈ ਹੈ ਹੁਕਮ ਨਾਲੇ ਪੈਦਾ ਹੋਈ ਹੈ ਮੇਰੇ ਲਈ ਉਹਨੂੰ ਚੇਤਾ ਕਰ ਲਓ ਉਸਦਾ ਕਰ ਹੁਕਮ ਨਾਲੇ ਦੂਜਾ ਨਹੀਂ ਹੋਰ ਕੋਈ ਹੈ ਹੋਰ ਕੋਈ ਸ਼ਕਤੀ ਨਹੀਂ ਹੈ ਨਾ ਪ੍ਰਭਾਨ ਅਭਿਰੂ ਦਾ ਕੋਈ ਹੋਰ ਤੁਖਮ ਨਾਲ ਪੈਦਾ ਹੋਇਆ ਸਭ ਕੁਝ ਹਾਂ ਜੀ ਖਾਣਾ ਸ਼ਬਦ ਚੰਗਿਆਈਆਂ ਖਾਦਾ ਹੈ ਸਦਾ ਖਾਣਾ ਦੀ ਹੈ ਸ਼ਬਦ ਦਾ ਖਾਣਾ ਉਪਦੇਸ਼ ਖਾਓ ਗੁਰ ਉਪਦੇਸ਼ ਖਾਓ ਚੰਗਿਆਈਆਂ ਖਾਣਾ ਸਭ ਚੰਗਿਆਈਆਂ ਇਹ ਤਖਤਾ ਸਦਾ ਤਰਫ ਤੋਂ ਇਹ ਦੇ ਖਾਨ ਕਰਕੇ ਸਦਾ ਬੁਨ ਸਦਾ ਵਾਪਸ ਤਰਫ ਤੋਂ ਜਿਵੇਂ ਮਾਇਆ ਦੀ ਬੁਖਤ ਲਈ ਜਾਵੇ ਹਾਂਜੀ ਪੈਨਣ ਸਿਫਤ ਸੁਨਾਏ ਹੈ ਸਦਾ ਸਦਾ ਉਹ ਊਜਲਾ ਪਹਿਨੀ ਹੈ ਨਾ ਸਿਫਤ ਦੀ ਸਨਾਹ ਸਨਾਹ ਦੀ ਇਹ ਜਰਾ ਬਖਤਰ ਬੁਲੇਟ ਪ੍ਰੂਫ ਜਾਗੜ ਪਹਿਨਦੀ ਨਾ ਗੁਰਬਾਣੀ ਰੂਪੀ ਸਦਾ ਸਦਾ ਉਹ ਜਲਾ ਮਹਿਲਾ ਕਦੇ ਨਾ ਹੋਏ ਉਹਦੇ ਤੇ ਮਹਿਲ ਦਾ ਦੀ ਸਨਾ ਪਹਿਨ ਲਈ ਸਿਰਫ ਦੀ ਸਨਾ ਪਹਿਨ ਲਈ ਉਹ ਨਹੀਂ ਮਹਿਲਾ ਹੁੰਦਾ ਸਦਾ ਉਜਲਾ ਰਹਿਣਾ ਨਾਲਾ ਨਹੀਂ ਹੁੰਦਾ ਇਹ ਕੇ ਜੀ ਸਹਜੇ ਸੱਚ ਤਨ ਖੱਟਿਆ ਥੋੜਾ ਕਦੇ ਨਾ ਹੋਏ ਸਹਜੇ ਸੱਚਾਂ ਖੱਟਿਆ ਉਹਨਾਂ ਨੇ ਕਾਹੇ ਵਸਤਾ ਜੋ ਕੇ ਸਾਕਾਂ ਖਟਿਆ ਵੰਡੂ ਟਕਾ ਕੇ ਸਮਝਿਆ ਗੁਰਬਾਨੀ ਨੂੰ ਪੂਰੇ ਠਿਕਾ ਹੋਏ ਹੈ ਤਾਂ ਖਟਿਆ ਗਿਆ ਧਾਨੇ ਥੋੜਾ ਦਾ ਦੇਣਾ ਹੋਏ ਹੁਣੇ ਘੜਦਾਲੀ ਹੈ ਠੀਕ ਹੈ ਜੀ ਦੇਹੀ ਨੂੰ ਸ਼ਬਦ ਸ਼ਿੰਗਾਰ ਹੈ ਜਿਤ ਸਦਾ ਸਦਾ ਸੁਖ ਹੋਏ ਨਾਨਕ ਗੁਰਮੁਖੀ ਬੁੱਝੀ ਹੈ ਜਿਸ ਨੂੰ ਆਪ ਵਿਚਾਰੇ ਸੋਏ ਜਿਹੜੀ ਅੰਧੇ ਦੀ ਹੈ ਉਹਦੇ ਫਾਸੇ ਸ਼ਬਦ ਸ਼ਿੰਗਾਰ ਕੀ ਹੈ ਉਹਦਾ ਹੀਦਾ ਸਦਾ ਜਨਾਰ ਹੈ ਜੇ ਤ ਸਦਾ ਸਦਾ ਸੁਖ ਹੋਏ ਸਦਾ ਸੁਖ ਹੋਏ ਉਹਦਾ ਸ਼ਨਾਰ ਹੈ ਗੁਣ ਹੈ ਉਹਦਾ ਸ਼ਨਾਰ ਦੇ ਨਾਨਕ ਗੁਰਮੁਖੀ ਹੁਜੀਏ ਜਿਸ ਨੂੰ ਆਪ ਦਰਸ਼ਨ ਹੋ ਗਿਆ ਉਦਲੀ ਦੇਹੀ ਦਾ ਦਾ ਪਰਮਾਨੰਦ ਦਾ ਦਰਸ਼ਨ ਹੋ ਗਿਆ ਉਹਨਾਂ ਨੂੰ ਹੈ ਭਰੋਸਾ ਇਸ ਗੱਲ ਦਾ ਉਹਰਾਣੀ ਬੁੱਧੀ ਠੀਕ ਹੈ ਜੀ ਪੌੜੀ ਅੰਤਰ ਜਪ ਤਪ ਸੰਜਮੋ ਗੁਰ ਸ਼ਬਦੀ ਜਾਪੈ ਹਰ ਹਰ ਨਾਮ ਧਿਆਈਐ ਹਉਮੈ ਅਗਿਆਨ ਗਵਾਪੈ ਗੁਰਬਾਣੀ ਜਾਪੈ ਗੁਰਬਾਣੀ ਨੂੰ ਜਪਣਾ ਚਾਹੀਦਾ ਹੈ ਇਹਦੇ ਵਿੱਚ ਹੀ ਹੈ ਜਪ ਤਪ ਸੰਜਮ ਤੇ ਗੁਰਬਾਣੀ ਨੂੰ ਸਮਝੀਏ ਜਪ ਤਪ ਸੰਜਮ ਵਿੱਚੇ ਆ हराल नाम रे है ओदे नाल होमे भी दूर हो भी दूर हो जी अंदर अमृत भरपूर है जिन च से निरभय पए ਤੇ ਹਰ ਰਸ ਧਰਾਪੈ ਅੰਦਰ ਅੰਮ੍ਰਿਤ ਭਰਪੂਰ ਹੈ ਅਬਰਤ ਅੰਦਰੇ ਭਰਪੂਰ ਹੈ ਆਖਿਆ ਸਾ ਜਪੈ ਜਿਹਦੇ ਚਾਖ ਲਿਆ ਪਤਾ ਲੱਗਦਾ ਜਿਹਨੇ ਪੀ ਰਿਆ ਉਹਨੂੰ ਸਾ ਸਮਝ ਆ ਜਾਂਦੀ ਹੈ ਜੇ ਚਾਖਿਆ ਸੇ ਨਿਰਭਉ ਹੋ ਜਾਂਦਾ ਨੇ ਤੇ ਹਰ ਰਸ ਧਰਾਪੈ ਹਰ ਰਸ ਦੇ ਨਾਲ ਅਨੰਦ ਹੋ ਜਾਂਦਾ ਨੇ ਰਸ ਜਾਂਦੇ ਨੇ ਠੀਕ ਹੈ ਜੀ ਹਰ ਕਿਰਪਾ ਧਾਰ ਪਿਆਇਆ ਫਿਰ ਕਾਲ ਨਾ ਵਿਆਪੈ ਜਿਹੜਾ ਹਰੀ ਨੇ ਇਹ ਤਾਂ ਗਰਪਾ ਕਰਕੇ ਪਿਆਰਤਾ ਜੀ ਨੂੰ ਉਹਨੂੰ ਫਿਰ ਕਾਲ ਨਹੀਂ ਵਿਆਪਦਾ ਕਾਲ ਨਹੀਂ ਉਹਦੇ ਰਣੇ ਹੁੰਦਾ ਅਗਲਾ ਨਹੀਂ ਜਨਮ ਹੁੰਦਾ ਉਹਦਾ ਠੀਕ ਹੈ ਜੀ ਇੱਥੇ 4ਵੀਂ ਪੌੜੀ ਸਮਾਪਤੀ ਹੈ ਜੀ